ਤੁਹਾਡੀ ਜਿਹੜੀ ਗਿਣਤੀ ਆ ਹਾਂਜੀ ਹਾਂਜੀ ਉਹ ਜਿਹੜੇ ਗਾਇਕ ਨੇ ਜਾਂ ਕਲਾਕਾਰ ਨੇ ਉਹਨਾਂ 'ਚ ਹੋਣ ਲੱਗ ਪਈ ਹੈ ਕਿਉਂਕਿ ਤੁਹਾਡੀ ਆਡियंस ਬਹੁਤ ਵੱਧ ਗਈ ਹੈ ਹਾਂਜੀ ਹਾਂਜੀ ਭਾਈ ਪਰ ਮੈਨੂੰ ਲੱਗਦਾ ਹਾਲੇ ਤੁਸੀਂ ਪੈਰ ਪੂਰ ਨਹੀਂ ਛੱਡੇ ਔਰ ਨਹੀਂ ਮੈਨੂੰ ਲੱਗਦਾ ਤੁਹਾਡੇ 'ਚ ਕੋਈ ਉਸ ਤਰ੍ਹਾਂ ਦੀ ਆਕੜ ਆਈ ਹੈ ਕਾਲਾ ਚਸ਼ਮਾ ਲਾ ਕੇ ਸਟੂਡੀਓ 'ਚ ਆਉਂਦੇ ਆ ਇੱਥੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ